ਲਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਢੰਡੂਲ ਇੱਕ ਇਸ ਬਾਜ ਨਾ ਕੋਏ ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਈ ਚਿੱਟੇ ਆਪਣਾ ਢੋਲ ਸਾਡੀ ਦੁਨੀਆ ਢੋਲ ਲਈ ਸਾਰੇ ਗ੍ਰੰਥ ਢੰਡੋਲ ਸਾਰੀਆਂ ਮੱਤਾ ਢੰਡੋਲ ਸਤਗੁਰ ਤੇ ਖਾਲੀ ਕੋਈ ਨਹੀਂ ਸਿੱਖ ਕੀ ਆ 1 ਨੰਬਰ ਤੇ ਆ ਜੋਤ 2 ਨੰਬਰ ਤੇ ਮਾਇਆ ਪਤੀਜਾ ਦਾ ਫਿਰ ਭਰਵੇਂ ਫਿਰ ਤਾਂ ਬਹੁਤ ਕੁਝ ਹੈ ਪਰਮ ਤਾਂ ਫਿਰ ਬਾਹਰ ਲੋਕੜੇ ਲੋਕੜੇ 1 ਨੰਬਰ ਤੇ ਸੱਚਾਈ ਤੇ 2 ਨੰਬਰ ਤੇ ਮਾਝੂ ਠਰਵਾਇਆ ਸੱਚ ਤੇ ਵੀ ਜੋਤ ਤੇ ਵੀ ਕੋਈ ਵੀ ਨਹੀਂ ਸ਼ਰੀਰ ਹੋ ਸਕਦਾ ਖਾਲੀ ਨਹੀਂ ਹੈ ਕੋਈ ਠੀਕ ਹੈ ਜੀ ਆਓ ਸੱਜਣ ਤੂੰ ਮੁਖੀ ਲੱਗ ਮੇਰਾ ਮਨ ਤਨ ਠੰਡਾ ਹੋਈ ਹੁਣ ਆਪਣੇ ਬੂਰ ਨੂੰ ਕਿਹਾ ਜੇ ਤੂੰ ਬੂਰ ਨੂੰ ਪੀਜੋ ਤੈਨੂੰ ਆਪਣੇ ਬੂਰ ਹੈ ਜਿਹੜਾ ਹਾਂਜੀ ਹੋਈ ਸੱਜਣਾ ਨਾ ਸੱਜਣ ਤੇ ਚੱਲਦੇ ਨਾਲ ਚੱਲਣ ਸੱਜਣ ਠੀਕ ਹੈ ਜੀ ਤੂੰ ਮੁੱਖ ਲੱਗ ਤੂੰ ਮੇਰੇ ਬੂਰ ਨੂੰ ਲਾ ਦੋ ਪੱਤ ਤੂੰ ਬੁਲਾ ਕੇ ਮੈਂ ਬੋਲਾਂ ਤੂੰ ਬੋਲ ਮੇਰੇ ਬੂਰ ਨਾਲ ਉਹ ਮੇਰਾ ਬੋਲ ਤੂੰ ਗੁਰਬਾਣੀ ਇਹਨਾ ਹੈ ਵੇੜੇ ਬੂਹ ਨੂੰ ਲੱਗ ਕੇ ਤੂੰ ਬੋਲ ਜਿੱਥੇ ਮੈਂ ਬੋਲਦਾ ਸੀ ਉਹ ਬੰਦ ਬੋਲਦਾ ਸੀ ਜਿਹੜੇ ਬੂਹ ਨਾਲ ਉਹ ਬੂਹ ਨਾਲ ਜੁੜ ਕੇ ਤੂੰ ਬੋਲ ਕਿਉਂਕਿ ਲੱਗ ਫੇਰ ਅਬ ਤਨ ਖੜਾ ਹੋਏ ਬੂਹ ਦੀ ਕਹਿੰਦੀ ਹੋਈ ਮਨ ਵੀ ਡਰਦਾ ਹੋ ਜੇ ਫਿਰਦਾ ਵੀ ਖੜਾ ਹੋ ਜੇ ਤੂੰ ਕਰ ਕਰ ਸੁਣਾ ਹਰ ਕੀ ਫੈਰਾਗ ਤੋਂ ਬਹਾਂ ਦਾ ਰਗ ਛੇੜ ਰਾਲੀ ਮਾਇਆ ਦਾ ਦੁਖੁਨਾਕਾਰ ਫਿਰ ਵੈਰਾਗ ਹੋਇਆ ਚੁੱਪ ਕਰ ਗਿਆ ਹੁਣ ਅਨੁਵਾਦ ਕੀਤਾ ਨਾਮ ਦੀ ਕਥਾ ਸੁਣਾ ਹਰ ਕਥਾ ਸੁਣਾ ਮੁੱਖ ਲੱਗਦਾ ਮਤਲਬ ਹੈ ਲੋ ਆਸ਼ਕ ਆਸਾ ਬਾਹਰਾ ਮੂਹ ਮਨ ਵੱਡੀ ਆਸ ਆਸ ਨਿਰਾਸਾ ਹਿੱਕ ਤੂੰ ਹਉ ਬਲ ਬਲ ਬਲ ਗਈ ਆਸ ਜਿਹੜੇ ਮੁਸਲਮਾਨ ਨੇ ਇਹਨਾਂ ਦੇ ਵਿੱਚ ਆਸ ਕਰੀ ਇਸ ਤੋਂ ਜ਼ਿਆਦਾ ਗੱਲ ਕਰਦੇ ਨੇ ਪੈਸੇ ਨੂੰ ਬੋਰਾਣਾ ਕਬੀਰ ਕਹਿੰਦਾ ਬੋਰਾ ਜਿਹੜਾ ਹੋ ਜਵੇ ਆਸ ਉਹ ਅਟਕ ਆਸਾ ਬਾਹਰ ਆਸਾ ਹੈ ਦੀ ਕਿ ਚਾਰੋਂ ਤਿਆਗ ਕੇ ਜਿਹੜਾ ਅਸਲ ਦੇ ਵਿੱਚ ਆਸ਼ਕਤਾ ਰਹਿ ਜਾਂਦਾ ਹੈ ਚਾਰ ਪਦਾਰਥ ਵੀ ਮਿਲਦੇ ਹਰੂ ਪੂਰਤੀ ਤਾਂ ਕੇ ਰਹਿ ਜਾਂਦਾ ਹੈ ਗੋਵਨ ਬੱਡੀ ਆਸ ਪਰ ਮੇਰੇ ਵਿੱਚ ਤਾਂ ਬਹੁਤ ਵੱਡੀ ਆਸ ਹੈ ਅੱਜ ਕੱਲ ਨਾ ਆਸਾ ਤਿਆਗ ਦੇਣੀ ਠੀਕ ਹੈ ਜੋ ਵੀ ਕਹਿੰਦੇ ਆ ਅਸਾਂ ਛੱਡਦੇ ਹੋ ਮੁਸਲਮਾਨ ਵੀ ਕਹਿੰਦੇ ਆ ਅਸਾਂ ਛੱਡਦੇ ਹੋ ਮੇਰੇ ਕੋਲ ਨਹੀਂ ਇਹ ਗੱਲ ਹੈ ਜਿਹੜੇ ਮੁਸਲਮਾਨ ਬਹੁਤ ਵੱਡੀ ਆਸ ਹੈ ਉਹ ਕੀ ਹੈ ਮਰ ਕੇ ਜਿਉਂਦਾ ਹੋਣਾ ਦੀ ਚਾਰੇ ਪਦਾਰਥਾਂ ਦੀ ਆਸ ਹੈ ਮੇਰੇ ਅੰਦਰ ਨਾਮ ਦੀ ਆਸ ਹੈ ਮੇਰੇ ਅੰਦਰ ਠੀਕ ਹੈ ਜੀ ਨਾਮ ਨਾਲ ਜਿਹਨ ਪਦਾਰਥ ਇੱਕ ਵੱਡੀ ਆਸ ਹੈ ਜਿਹੜਾ ਮਤ ਹੈ ਜਿਹੜੀ ਧਰਪਨ ਹੈ ਵਿਚਾਰਤਾ ਰਹਾ ਹੈ ਉਹ ਐਸ ਵਿਚਾਰਤਾ ਨੂੰ ਵਖਰੀ ਹੈ ਜਿਹੜੇ ਕਹਿੰਦੇ ਨੇ ਆਸਾਂ ਤਿਆਗ ਕੇ ਵਾਇਆ ਦੀ ਇੱਛਾ ਤਿਆਗ ਕੇ ਬਸ ਸਤਮੋਗੀ ਗੱਲ ਹੋ ਗਈ ਠੀਕ ਹੈ ਉਹ ਕਹਿਣਾ ਚਾਹੁੰਦੇ ਏਕ ਆਸ ਰੱਖੋ ਮਨ ਮਾਹੇ ਉਹ ਰੱਖਣੀ ਹੈ ਜੀ ਹਾਂ ਹਾਂ ਤਾਂ ਰੱਖੜੀ ਦਾ ਮਤਲਬ ਹੀ ਨਹੀਂ ਫਿਰ ਕੋਈ ਠੀਕ ਹੈ ਆਸ ਨਿਰਾਸ਼ਾ ਹਿੱਕ ਤੋਂ ਹੋਂ ਬਲ ਬਲ ਬਲ ਗਈ ਆਸ ਆਸਾਂ ਦੇ ਬਿੱਤੇ ਨਿਰਾਸ਼ਾ ਤੋਂ ਇੱਕ ਆਸ ਵੀ ਹੈ ਸਾਰੇ ਬਾਜ਼ਾਰਾਂ ਤੋਂ ਬਿਰਾਸ ਝੂੜਦੀ ਆਸ ਛੱਡ ਦਿੱਤੀ ਹੈ ਆਸਰਾ ਛੱਡ ਦਿੱਤਾ ਝੂੜਦਾ ਤੇ ਸੱਚ ਦੇ ਆਸਰੇ ਦੀ ਲੋੜ ਹੈ ਨਾਮ ਦੇ ਆਸਰੇ ਦੀ ਲੋੜ ਆਪ ਤਾਂ ਬਿਰਲਾ ਤਾਂ ਸੱਦਾ ਹੀ ਨਹੀਂ ਕਿ ਆਸਾਂ ਵਾਹੇ ਮੇਰਾਸੋ ਇੱਕ ਤੂੰ ਤੂੰ ਜਿਹੜਾ ਹੈਗਾ ਜੋ ਕਾਰ ਹੋ ਚੁੱਕਿਆ ਜੋ ਬੋਲਦਾ ਹੈ ਬੁਲਾ ਰਿਹਾ ਤੂੰ ਆਸ ਆਸੂਦੀ ਹੋਈ ਵਿਦਿਆਸ ਇੱਕ ਤੂੰ ਕਬੋਂ ਬੰ ਵੱਡੀ ਆਸ ਤਾਂ ਜੋ ਹੈ ਆਪਣੀ ਤਾਂ ਦਸਤੀ ਨੂੰ ਤਾਂ ਤੂੰ ਕਹੇ ਹਾਂ ਬਲ ਬਲ ਬਲ ਗਈ ਆਸ ਮੈਂ ਇਥੇ ਕਰਕੇ ਤੇ ਤੇ ਕੁਰਬਾਨ ਚਲਾ ਹੋ ਗਿਆ ਇਸੇ ਕਰਕੇ ਤੇਰੇ ਤੇ ਕੁਰਬਾਨ ਹੋ ਗਿਆ ਕੁਰਬਾਨ ਹੋ ਗਿਆ ਕੁਰਬਾਨ ਹੋ ਗਿਆ ਕਿ ਤੂੰ ਆਸ ਵਿੱਚ ਨਾ ਚਿੰਤਾ ਵੀ ਹੈ ਸਰਬ ਕੀਿਰਤਾ ਜੇ ਸੰਬੋਧ ਹੈ ਪਰ ਡਰ ਪਾਇ ਵੀ ਹੁਣ ਇਹ ਓਕੀ ਗੱਲ ਹੈ ਸਰਬ ਕੀਿਰਤਾ ਨੂੰ ਲੈ ਕੇ ਪਰ ਪਰਦੇ ਵੀ ਡਰ ਪਾਇ ਪੈਦਾ ਰੂਪ ਹੈ ਅਜੀਬ ਗੱਲ ਹੈ ਇਹੀ ਗੱਲ ਵੀ ਸਾਨੂੰ ਚਾ ਰਹੀ ਤੇਰੀ ਕਿੰਤਾ ਵੀ ਹੋਵੇ ਨਰ ਵੀ ਹੋਵੇ ਤੇ ਸਰਬ ਕਲਾ ਸੰਭਰਖ ਹੈ ਨੋ ਇਸ ਕਰਕੇ ਦੀ ਜਿੰਤਾ ਇਸ ਕਰਕੇ ਦਿਸ ਪੈ ਰਹੀ ਹੈ ਘਰਤਾ ਤੇਰੇ ਸਭ ਕੁਝ ਹੈ ਇਸ ਕਰਕੇ ਕੋਈ ਪੈ ਨਹੀਂ ਪਜੇ ਬਾਰੇ ਰਾਜਾਂ ਲਈ ਜੋਗ-ਜੁਗ ਤੇ ਪਾਈ ਹੈ ਇਤਤਕ ਤੱਕ ਮੁਤੀ ਹੋਈ ਹੈ ਅੱਛਾ ਜੀ ਹਾਂ ਜੀ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰਉਂਦ ਅਜੀ ਤਾਂ ਇਹ ਸੁਣਦੇ ਜਿਹੜਾ ਵਿਛੋੜਾ ਹੈ ਇਹੀ ਤੋਂ ਖਾਦੀ ਖਾਲ ਦੇ ਸਾਰੇ ਦੁੱਖਾਂ ਦਾ ਕਾਰਨ ਵਿਛੋੜਾ ਹੀ ਆਪਣੇ ਮੂਲੂ ਆਪਣਾ ਆਪੂ ਪਿਛੜੂ ਦਾਹੋ ਕੇ ਰਲੂ ਇਹ ਤਾਂ ਦੁੱਖਾਂ ਹੈ ਇਹ ਤਾਂ ਦੁੱਖ ਸਾਰੇ ਦੁੱਖਾਂ ਦਾ ਮੂਲ ਨੂੰ ਦੇਖ ਨਹੀਂ ਲੈਂਦਾ ਦਰਸ਼ਨ ਨਹੀਂ ਕਰ ਲੈਂਦਾ ਉਹਨਾਂ ਜਾਂਦਾ ਬੜਿਆ ਬੜਾਇਆ ਹੈ ਇਹ ਮਤਲਬ ਹੀ ਪਾਉ ਇਹਨੂੰ ਮਰੇ ਉਹ ਜਬਰਵਲ ਜਿਹਾ ਹੋਊਗਾ ਇਹਨਾਂ ਜਿਹੜਾ ਆਪਣਾ ਮੂਲ ਨਹੀਂ ਪਛਾੜ ਲੈਂਦਾ ਠੀਕ ਹੈ ਬਾਜ ਪਿਆਰੇ ਅਪੜ ਬਿਰਿਨ ਤੇ ਆਪਣੇ ਪਿਆਰੇ ਤੇ ਮੈਨੂੰ ਜਿਹੜੇ ਬਿਰਹੀ ਦੇ ਈਰ ਦੇ ਅੰਦਰ ਬਿਲਾਪ ਹੋ ਗਿਆ ਤੇ ਈਰ ਜੇ ਨਹੀਂ ਆਇਆ ਤੇ ਈਰ ਆਏ ਨਹੀਂ ਸਕਦਾ ਕਿਉਂਕਿ ਸ਼ਾਲਤੀ ਆਏ ਨਹੀਂ ਸਕਦੀ ਵੀ ਮਿਲਾਪ ਜਦ ਹੋਊਗਾ ਤਾਂ ਫਿਰ ਟੀਰ ਹਾਂਜੀ ਠੀਕ ਹੈ ਉਸ ਤੋਂ ਪਹਿਲਾਂ ਬਿਰਹਾ ਹੈ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਂਦ ਹਾਂ ਜਦ ਪਤਾ ਲੱਗਿਆ ਮੈਂ ਬਿਛੜਾ ਹੋਇਆ ਹਾਂ ਬਿਰਹਾ ਤਾਂ ਬਿਲਾਪ ਹੋ ਗਿਆ ਪਰ ਬਿਲਾਪ ਤੇ ਬਿਨਾਂ ਅਲਾਜ की ਹਾਂਜੀ ਪੌੜੀ ਤੱਟ ਤੀਰਥ ਦੇਵ ਦਿਵਾਲਿਆਂ ਕੇਦਾਰ ਮथुरा ਕਾਸ਼ੀ ਕੋਟ 33ਾਂ ਦੇਵਤੇ ਸਣ ਇੰਦਰ ਜਾਸੀ ਕੱਕ ਕਰਨਾਰੀਅਮ ਤੇ ਦਰਿਆਮ ਦੇ ਉਤੇ ਪੀਰ ਸੁਧਦੇ ਦੇ ਦਿਵਾਲੇ ਉੱਤੇ ਦੇਵਤੇ ਉੱਤੇ ਨੇ ਰੱਖੇ ਹੋਏ ਵਿੱਚ ਗੁਦਰਾਮ ਜੇ ਦਰਵਾਜ਼ੇ ਜਾਂ ਬਥਰਾ ਕਾਸ਼ੀ ਇਹ ਸਭ ਤੀਰਥ ਬਣੇ ਇੱਥੇ ਹੀ ਕੁਝ ਕੋੜ 33 ਦੇਵਤੇ 33 ਕਰੋੜ ਦੇਵਤੇ ਬੁੱਲਿ ਹੋਏ ਨੇ ਇਹਨਾਂ ਦੇ ਸਾਰੇ ਇੱਧਰ ਇੱਧਰ ਸਾਰੇ ਹੀ ਸ਼ਾਸਤਰ ਵੇਦ ਚਾਰ ਖਟ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਵੀ ਜਾਸੀ ਸਿਬੁਰਤੀਆਂ ਦੇ శాਸਤਰ ਦੇ ਲਿਖੇ ਹੋਏ 18 ਪ੍ਰਾਣ বেদ ਦੇ ਚਾਰ ਖੰਡ ਦਰਸ਼ਨ ਸਾਰੇ ਸੁਬਾਸੀ ਸਾਰੇ ਨੂੰ ਟੋਟਲ ਇਹ ਖੰਡ ਦਰਸ਼ਨ ਸੁਬਾਸੀ ਕਿੰਦੇ ਵੀ ਹੈ ਉਥੇ ਪੰਡਤ ਕੋਥੀਏ ਦੇ ਪੰਡਤ ਪੰਡਤ ਲਿਖਦੇ ਨੇ ਕੋ ਲਿਖੇ ਪਏ ਪੜ੍ਹਦੇ ਨੇ ਕਪਤੇ ਵੀ ಜಾਸੀ ਕਵਿਤਾ ਕਰਨ ਵਾਲੇ ਵੀ ਸਾਰੇ ਨੂੰ ਵਾਲੇ ਵੀ ਸਾਰੇ ਮਰ ਜਾਣਗੇ ਕਿਸੇ ਨੂੰ ਚਲੂ ਬਾਜ਼ਾਰ ਸਰ ਮੁਤੀ ਦੀ ਮਿਲ ਲਈ ਇਹਦੇ ਚੋਹ ਜੀ ਬਾਕੀ ਕਾਫੀ ਕਠੋਰ ਬਚਨ ਹੈ ਜੀ ਕੀ ਕਰੀਏ ਹੁਣ ਜਿਵੇਂ ਹੈ ਉਹਵੇਂ ਕਹਿਣਾ ਪਊਗਾ ਸੰਜੇ ਦਾ ਸੱਤੀ ਬੈਠਣਾ ਹੈ ਜੀ ਠੀਕ ਹੈ ਸਿਮਰਤੀ ਸਾਸਰ 베ਦ ਚਾਰ ਖਟਦਰਸ ਇਹੀ ਧਰਮ ਦਾ ਖਜ਼ਾਨਾ ਹੈ ਜੀ ਉਹਨਾਂ ਦਾ ਇਹੀ ਲਿਖਤਾ ਉਹਨਾਂ ਦੀ ਇਹੀ ਹੈ ਕਾਰਨ ਹੈ ਸੱਤੀ ਤਵੀ ਤੇ ਬੈਠਣ ਦਾ ਉਹ ਜਿਹੜਾ ਹੈ ਨਾ ਰਿਸ਼ਤੇ ਦਾ ਕਾਹਨ ਦੀ ਉਹ ਜਾਣ ਕੇ ਬਣਾਇਆ ਹੋਇਆ ਵੀ ਲੋਕਾਂ ਦਾ ਧਿਆਨ タルਬ ਨੂੰ ਚਲੇ ਜਾਵੇ ਤੇ ਪਾਸਟਰ ਪਈਆ ਗੱਲ ਦੇਖ ਲੋ ਦਾ ਬਣਾਇਆ ਜਾਣ ਕੇ ਰਿਸ਼ਤੇ ਵਾਲਾ ਉਹਦੀ ਬਿਲਕੁਲ ਹੀ ਨਹੀਂ ਰਿਸ਼ਤੇ ਵਾਲੀ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਉਸੇ ਲਈ ਧਿਆਨ ਤਾਂ ਪੜਨ ਲੱਗ ਜਾਣ ਜਿਵੇਂ ਲੋਕਾਂ ਨੂੰ ਕਹਿੰਦਾ ਧਰਮ ਕਰਕੇ ਕੀਤਾ ਲੋਕ ਧਰਮ ਨੂੰ ਤਾਂ ਪ੍ਰੇਮ ਕਰਦੇ ਸੀ ਫਿਰ ਬਗਾਵਤ ਹੋ ਜਾਂਦੀ ਠੀਕ ਹੈ ਜੀ ਜਤੀ ਸਤੀਸ਼ ਅਨਿਆਸੀਆ ਸਭ ਕਾਲੇ ਵਾਸੀ muni योगी दिगम्बरा जमे सण जासी आ देखो जिने जतीर छत रखने वाले सती ने सतवादी दिग, दे जिने सण जासी दे सब काल है ਨੇ सब काल दे वास ने जम्बलपाल ते ने बूढी योगी ਨਹੀਂ ਮਰਨਾ ਆਪਣਾ ਸਰੀਰ ਕਰਕੇ ਹੈ ਇਹਦੀ ਗੱਲ ਹੋ ਰਹੀ ਹੈ ਕਿ ਜਨਪਦਾਰਥ ਦੀ ਗੱਲ ਹੋ ਰਹੀ ਹੈ ਮੈਂ ਬੋਲੀ ਆਪਣੀ ਜਮਾਨ ਦੇ ਕਹਿਣਾ ਸੰਸਾਰੀ ਬੋਲੀ ਚ ਇਹ ਤਾਂ ਝਾਤੀ ਹੈ ਆਵੜ ਜਾਂਦਾ ਹੈ ਗੁਰਮੁਖ ਜਾਣਾ ਗੁਰਪੁਣ ਤਾਂ ਆਵੜ ਜਾਂਦਾ ਹੈ ਜਿੱਥੇ ਉੱਥੇ ਥਿਰ ਹੋ ਗਿਆ ਫਿਰ ਜਿਆ ਸਰਬਆਪਤੀ ਹੋਣਾ ਉੱਥੇ ਹੋ ਗਿਆ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਫਿਰ ਹੋਸੀ ਜੋ ਜੀਦਾ ਉਹ ਤਾਂ ਮਿਲਣ ਵਾਲਾ ਸਭ ਦੇ ਨਸ਼ ਬੰਦਾ ਸੀ ਸਭ ਨਾਸ ਹੋ ਰਿਹਾ ਸਭ ਦਾ ਹੁਣ ਇੱਥੇ ਜਦ ਅਸੀਂ ਕੋਠੀ ਸਾਹਿਬ ਦੀ ਗੱਲ ਕਰਾਂਗੇ ਫਿਰ ਕੀ ਆ ਉਹ ਵੀ ਤਾਂ ਚੀਜ਼ ਲਾਗੂ ਸਾਡੇ ਤੇ ਵੀ ਹੁੰਦਾ ਬੜੇ ਹੌਸਲੇ ਨਾਲ ਗੱਲ ਬਾਣੀ ਸੁਲੀ ਪਾਉਗੀ ਜਿੜਤਾ ਨਾਲ ਖੜਨਾ ਕੋਉ ਤਾਂ ਸਾਡੀ ਪਰਲੇ ਪਊਗਾ ਤਾਂ ਦੁਰੀਏ ਨੂੰ ਅਸੀਂ ਜਵਾਬ ਦੇ ਸਕਾਂਗੇ ਵੀ ਹਾਂ ਸਾਡਾ ਸਟੈਂਡ ਕੀ ਹੈ ਕਬੀਰ ਨਾਹਿ ਕਹਿੰਦਾ ਅਸੀਂ ਇਹ ਅੱਖਰ ਖਿਰਜਾਂਗੇ ਉਹ ਅੱਖਰ ਕਿਦਵੇਂ ਲੋਗੇ ਜੋਤ ਲਈ ਹੈ ਇਹਨਾਂ ਦੇ ਵਿੱਚ ਅੱਖਰ ਸ਼ਬਦ ਵੀ ਦੀ ਹੈ ਸ਼ਬਦ ਕੱਢਣ ਦਾ ਅੱਖਰ ਅੱਖਾਂ ਦਾ ਵਿਚਾਰ ਹੁੰਦਾ ਪਾ ਕੁਛ ਅਸੀਂ ਗੱਲ ਪ੍ਰਚਾਰ ਕਰ ਚੁੱਕੇ ਬੜਾ ਮੁਸ਼ਕਲ ਹੋ ਗਿਆ ਹੁਣ ਤੁਹਾਨੂੰ ਵੀ ਮੁਸ਼ਕਲ ਹੋ ਗਿਆ ਹਾਂਜੀ ਪੁੱਤੀ ਸਾਹਿਬ ਵੀ ਦਿਸਣ ਵਾਲੀ ਚੀਜ਼ ਹੀ ਹੈ ਫਿਰ ਤਾਂ ਮਾਤ ਦੇ ਰਵਾਲੀ ਕੀ ਹੈ ਅਸੀਂ ਸੰਸਕਾਰ ਕਰਦੇ ਆ ਆਪਣੇ ਹੱਥੀ ਵੀ ਕਰਦੇ ਫਿਰ ਦੇ ਹਾਂਜੀ ਕੋਈ ਕਾ ਤੇ ਕਹਿੰਦੇ ਸੱਚ ਪ੍ਰਾਣਾ ਹੋਵੇ ਨਹੀਂ ਸੱਚ ਦਾ ਪ੍ਰਾਣਾ ਨਹੀਂ ਹੁੰਦਾ ਫਿਰ ਸਭ ਜਾਣਦੇ ਆ ਭੁੱਲਦੇ ਆ ਲੇਕਿਨ ਕਹਿੰਦੇ ਵੇਲੇ ਜੇ ਕਹਿ ਲਿਏ ਤਾਂ ਬਰਦਾਸ਼ਤ ਨਹੀਂ ਇਹ ਤਾਂ ਕੱਟੜਪਨ ਹੈ ਇਹੀ ਤਾਂ ਕੱਟੜਵਾਦ ਹੈ ਸਰਬ ਦੇ ਵਿੱਚ ਹਰ ਘਰ ਵਿੱਚ ਕੱਟੜਵਾਦ ਹੁੰਦਾ ਈ ਹੈ ਇਹੀ ਕੱਟੜਵਾਦ ਹੈ ਸੱਚ ਨੂੰ ਸੋਲਣ ਦੀ ਕਪੈਸਿਟੀ ਹੋ ਚੁੱਕੇ ਸੀ ਔਰ ਬੜਾ ਹੈ ਖਤਰਨਾਕ ਔਰ ਦੁਖਦਾਈ ਪਹਿਲੂ ਹੈ ਸਿੱਕੀ ਦਾ ਚਿੱਕੀ ਲੈਣ ਤੇ ਆਜਵੇ ਇਹੀ ਅੜਕਾ ਦੇ ਲੋਕ ਜਿਹੜੇ ਆਪਣੇ ਆਪ ਨੂੰ ਸਰਕਾਰ ਦੇ ਕਟੜਵਾਦੀ ਇਹੀ ਖੜੇ ਹੋਣਗੇ ਵੀ ਅਸੀਂ ਇਹ ਗੱਲ ਹੀ ਕਹਿਣ ਦੁੱਦੇ ਇਹੀ ਰੌਲਾ ਪਾਉਂਦੇ ਨੇ ਚਿੱਕੀ ਦਾ ਇੱਕ 32 ਮੀੜ ਸੁਦੀ ਇਹਨਾਂ ਲੋਕਾਂ ਦੇ ਵਿੱਚੋਂ ਨਾ ਹੋਵੇ ਇਹ ਤਾਂ ਵਿਰੋਧੀ ਨੇ ਚਿੱਕੀ ਦੇ ਅਸਲ 'ਚ ਹਾਂਜੀ ਥਿਰ ਪਾਰਬ੍ਰਮ ਪਰਮੇਸ਼ਰੋ ਸੇਵਕ ਥਿਰ ਹੋਸੀ ਤਾਂ ਤਾਂ ਪਾਰਬ੍ਰਮ ਪਰਮੇਸ਼ਰ ਉਹ ਥਿਰ ਹੈ ਫਿਰ ਨਾਲ ਲੈਣ ਸਰਗੁੜੂ ਯਾਦ ਆ ਸੇਵਕ ਫਿਰ ਅਜੇ ਆ ਗਿਆ ਨਾ ਜਾਣਾ ਉਹਨਾਂ ਕਟਿਆ ਗਿਆ ਗੁਰਮੁਖ ਉਹ ਨਹੀਂ ਫਿਰ ਜਾਂਦਾ ਸੇਵਕ ਤੋਂ ਭਾਵ ਗੁਰਮੁਖ ਹੋ ਗਿਆ ਹਾਂਜੀ ਬਾਜੀ ਸੇਵਕ ਕਿ ਹੁੰਦਾ ਗੁਰਮੁਖ ਠੀਕ ਹੈ ਜੀ ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ